ब्रह्मज्ञानी एक ऊपर आस ब्रह्मज्ञानी का नहीं विनाश हां ब्रह्मज्ञानी एक ऊपर आस हम जानते हैं बिहारी ना है ब्रह्मज्ञानी एक ऊपर आस हां ब्रह्मज्ञानी की एक ऊपर आस यानी वो पता है कि नहीं हां पता है ब्रह्मज्ञानी थे एक ऊपर आस यानी आस की जो ਦਿੱਕਤੋ ਪ੍ਰਾਪਤੀ ਹੋਣੀ ਹੈ है वो ਦੇਵੀ देवी ਵਿਚਾਂ ਦਾ ਅਸਰ ਹੀ ਕਰਦਾ ਬਸ ਸੰਸਾਰ ਦੇ ਵਿੱਚ ਕੋਈ ਨਹੀਂ ਸਾਬਤ ਨਹੀਂ ਹੈ ਨਹੀਂ ਸੰਸਾਰ ਦੇ ਵਿੱਚ ਕੋਈ ਨਹੀਂ ਸਾਬਤ ਨਹੀਂ ਜੇ ਸਾਬਤ ਹੈ ਵੀ ਜੇ ਕੋਈ ਸਾਬਤ ਹੈ ਉਹਦੇ ਹੱਥ ਖੜੇ ਨੇ ਵੀ ਮੈਂ ਨਹੀਂ ਕੁਝ ਦੇ ਸਕਦਾ ਮਨੇ ਅਨੇਕਾ ਕਿਉਂਕਿ ਜਿਹੜੇ ਤਕੂਲ ਬ੍ਰਹਮਣੇ ਨੇ ਹਨ ਇੱਕ ਪੂਰਨ ਮੁ੍ਰਤਿਆ ਸੋਹਣੀ ਹੈ ਸਾਰਿਆਂ ਤੇ ਉਹਨ ਇੱਕੋ ਗੱਲ ਸੁਭੋਗ ਤੋਂ ਮੁਚਿਆ ਨਾ ਹੁਕਮ ਤੇ ਆ ਗਈ ਹੈ ਇੱਕ ਤਾਂ ਨਾ ਦੀ ਜਿਲੀ ਇਕਤਾ ਜੜੀ ਹੈ ਜਹਰ ਹੁਕਮ ਚ ਹੀ ਹੁੰਦੀ ਹੈ ਉਹਨਾਂ ਦੀ ਜਿਲੀ ਇਕਤਾ ਸਾਰਿਆਂ ਦੀ अतरास में जो मिले अतरास आधे इक ने पर प्रकट ज्यादा हुक्म होता है जो बोल दे नहीं जदे प्रकट हो इच्छा जो प्रकट हो इच्छा जड़ी इच्छा होगी के न दो न ब्रोदर और सारे खुश ने खड़े मत ने जे चलो कई पार्टी जात में बैठे कुठे-कुठे बैठे ने निकल गलदा है ना ने पास गलई फरमाया था जवानक नहीं सी वो कुठे نو بیکاز نماز تو ਸ਼ਦਾ صدا سبحان اللہ صدا میں گا اسی واسطے بچے ہاں تے انلے او حکم دے پراس دی جو بھی ہے حکموں اے کہاں ہے اور انے کیں پھر تے تے نہیں اودے تے حکم ہی ہیں اودے تے ਸੋ ਜੀ ਸਰਦੋ ਗਜ਼ਾਤਾ ਚਾਹ ਕੇ ਦਾ ਸੇ ਕੰਮ ਦੇ ਨਾ ਜੀ ਬ੍ਰਹਮ ਗਿਆਨੀ ਕੀ ਇੱਕ ਉਪਰਾਸ ਬ੍ਰਹਮ ਗਿਆਨੀ ਕੀ ਇੱਕ ਉਪਰਾਸ ਬ੍ਰਹਮਾ ਨੇ ਤੇ ਉਹ ਕੋਈ ਆਸ ਕਿਸੇ ਤੇ ਕਿਸੇ ਗੁਰੂ ਤੇ ਵੀ ਆਸ ਨਹੀਂ ਉਹਦੀ ਆਪਣਾ ਤੇ ਜਿਹੜੇ ਬੰਦੇ ਨੇ ਉਹਨੂੰ ਸਿੱਖਿਆ ਦਿੱਤੀਆਂ ਮਾਪੇ ਆਪੇ ਹੀ ਤਾਂ ਕੋਈ ਸੰਸਾਰੀ ਕਿਸੇ ਤੇ ਆਸ ਸੱਧਿਆ ਦੀ ਸੰਸਾਰ ਦੀ ਆਸ ਨਹੀਂ ਹੁੰਦੀ ਸੰਸਾਰ ਚ ਲੈਣੇ ਕੋਈ ਨਹੀਂ ਆਸ ਕੀ ਹੈ ਆਸ ਹੀ ਆ ਸਵਾਲ ਹੈ ਬਾਹਾਂ ਜਹ ਕੀ ਲਾਜ ਆਸ ਆਸ ਘੜੀ ਨਾ ਦੇਖਣ ਦੇ ਆਸ ਆਸ ਸ੍ਰੀ ਜਤਨ ਵਾਲੇ ਕਦੇ ਸੁਭਤ ਇਦ ਨੂੰ ਡੋਲਣਾ ਹੈ ਡੋਲਣ ਦੇ ਰੱਖੋ ਪ੍ਰਭੂ ਆਸ ਆਸ ਜੇ ਤਨ ਕਿਲਾ ਤੋਂ ਪਰੇ ਆਸ ਦੇਖੀਏ ਜੇ ਤਨ ਕਿਲਾ ਤੋਂ ਆਸ ਗੱਲ ਇੱਕੋ ਹੀ ਹੈ ਗੱਲ ਇੱਕੋ ਹੀ ਹੈ ਆਈਆ ਆਸ ਉਹ ਜਦੋਂ ਸਰੀਰ ਸਿੱਟ ਰਾਂ ਉਦੋਂ ਕਿਤੇ ਬੈਠ ਰਾਂ ਅੱਜ ਵੀ ਸਭ ਤੋਂ ਪਰਪਰ টাই ਉਹ ਉਹ ਆ ਛਣਾ ਉਹ ਛਣਾ ਕੋ ਜੇ ਉਹ ਛਣ ਗਿਜਤ ਹੋ ਗਿਆ ਫਿਰ ਪਾਰ ਪਹਿਲਾਂ ਕੋਲੀ ਕੋਈ ਤਾਂ ਤੁਹਾਨੂੰ ਜਨ ਛਣਾ ਇੱਕ ਛਣ ਜਨ ਇੱਕ ਜਨ ਉਹ ਛਣ ਜੇ ਇੱਕ ਜਨ ਤੇ ਆਇਓ ਗਲ ਫਾਸ ਤੇ ਉਹ ਛੱਡ ਦੀ ਗੱਲ ਸੀ ਆਖਰੀ ਸ਼ਨਾਗਰਾ ਆਖਰੀ ਸਾਹ ਹੈ ਜਿਹੜਾ ਉਹ ਹੀ ਮਰਨਾ ਸਫਲ ਸੁੱਖਾ ਸੱਲੇ ਮਰਨਾ ਹੋਏ ਨਾਨਕ ਜੇਕਰ ਸਾਹਿਬ ਮਰੋਣਾ ਬਿਸਰਾ ਜੇ ਅੰਤਰਾਤਮਾ ਮਨਾ ਬਿਸਰੇ ਬੰਦੇ ਆਪਣਾ ਹੂਲਾ ਬਿਸਰੇ ਆਜ ਬਾਲਾ ਸ਼ਰੀਰ ਦਾ ਮਾੜਾ ਤੋਂ ਗੱਲ ਲਈ ਉਹਦਾ ਜਦ ਬੈਠਾ ਹੈ ਕਿਸੇ ਜੀ ਤੇ ਜਬ ਮੇਰੇ ਇਨਸ਼ਾਅਲਾ ਤੇ ਮੇਰੇ ਕੋਲ ਹੈ ਤੇ ਪਰ ਇਨਸ਼ਾਅਲਾ શરીਰੇ ਮੇਰੇ ਇਨਸ਼ਾਅਲਾ ਹੋ ਜਾ ਸਰ ਰੱਖਿਆ ਹੋਇਆ ਇਹ ਉੱਤੇ ਬੈਠਾ ਹੋ ਉੱਤੇ ਕਮ ਬੈਠਾ ਇਸ ਸ਼ਰੀਰ ਅੰਦਰੋਂ ਬਾਹਰ ਬਾਹਰ ਉਹ ਬਾਹਰ ਉਹ ਤਾਂ ਤਾਂ ਉਪਰ ਆ ਗਿਆ ਜਿੱਦਾਂ ਸ਼ਰੀਰੋ ਦੇ ਵਿੱਚ ਛੱਡੇ ਹੋਇਆ ਆਉਦਾ ਸ਼ਰੀਰ ਹੀ ਫੜੇ ਆਇਆ ਉਹ 8 ਸਾਲਾਂ ਦੀ ਜੁੱਭਲ ਵਾਰੀ ਫੜੀ ਹੋਈ ਹੈ 8 ਸਾਲਾਂ ਤੋਂ ਜੁੱਭਲ ਵਾਰੀ ਫੜੀ ਹੋਈ ਹੈ ਉਹ ਨਜ਼ਰ ਵਾਤੇ ਫੜੇ ਆਇਆ ਜੇ ਨਜ਼ਰ ਇਹ ਇਹਦੀ ਢਕਾਉਣ ਦੀ ਜ਼ਿੰਮੇਵਾਰੀ ਹੈ। ਕਿ ਆਂਸਰ ਉਹ ਤਾਂ ਹੈ ਥੋੜਾ ਜਿਹਾ ਦੇਣਾ ਪੈਦੋਂ। ਫਿਰ ਇਹ ਵੀ ਦੇਣਾ ਪਊ। ਇਹ ਤੋਂ ਤਾਂ ਹਟਾ ਕੇ ਫਿਰ ਫਿਰ। ਉਹ ਤੋਂ ਮਾਂ ਥੋੜਾ ਜਿਹਾ ਨਾ ਕਰ ਜਵੇ। ਕੋਈ ਫੇਰ ਉਹ ਵਲ। ਉਹ ਆਸ ਉਹ ਤੇ ਵੇ ਹੁਕਮ ਜੇ ਸੁਖਦਾ ਰਹਾ ਤਾਂ ਦੀ ਕਿਤੇ ਹੁਕਮ ਨਾ ਫਸ ਆ ਵੀ ਜਦੋਂ ਦੋ ਦੋ ਕਿਹਾ ਜਾਣੇ ਕਿਹਾ ਜਦੋਂ ਜਦੋਂ 1 ਮਿੰਟ ਜਾਂ 2 ਮਿੰਟ ਜਨਮ ਤੋਂ ਬਾਅਦ ਰੁਕ ਗਿਆ ਨਾ ਰਸਾ ਬੱਚੇ ਦਾ ਜਦੈ ਤ੍ਰਿਸ਼ਨਾ ਲੱਗੀ ਜੇ ਕੋਈ ਤਾਂ ਕਦਾ ਹੋ ਗਈ ਉਹ ਪੈਦਾ ਨਾ ਹੋ ਜਵੇ ਤਾਂ ਤਾਂ ਉਹ ਪੈਦਾ ਹੋਵੇ ਉਹ ਇੱਕ ਉਪਰਾਸਾ ਟੁੱਟੀ ਚਲਦੀ ਰਹੇ ਪਾਣੀ ਆਉਂਦਾ ਰਹੇ ਜੇ ਤਾਂ ਆਉਂਦਾ ਹੈ ਤਾਂ ਦੁੱਧ ਚੁੰਮਦਾ ਬੱਚਾ ਬੱਚਾ ਕਹਿੰਦਾ ਦੁਨੀਆ ਦਾ ਨਾ ਦੁਨੀਆ ਦੇ ਹੀ ਲੈਣਾ ਉਹਦਾ ਜਿਆਦਾ ਨੂੰ ਦੁੱਧ ਆ ਰਿਹਾ ਉਹਨੂੰ ਹੋਤੀ ਜਾਈਦਾ ਉਹ ਤਾਂ ਉੱਪਰ ਹੋਰ ਨੂੰ ਹੋਰ ਗੁੱਝਦਾ ਜੇਪਾਂ ਹੋਦੀ ਮਤਲਬ 26 ਅਵਦਨਾਂ ਜਲਦੀ ਗਿਆ ਨਾ ਦੁੱਧ ਦੁੱਧ ਜੀਵੰਤ ਆ ਰਹੇ ਦੁੱਧ ਉਹ ਤਾਂ ਮੂੰਹ ਜਾ ਉਹ ਜੀਵਤ ਚੱਲੂ ਹੱਸ ਉਹ ਜਿਹੜਾ ਸ਼ਬਦ ਹੈ ਉਹ ਜੀਵਨ ਆਧਾਰ ਹੈ ਪ੍ਰਾਣ ਆਧਾਰ ਹੈ ਹੁਣ ਪ੍ਰਾਣ ਆਧਾਰ ਉਹ ਜਿਵੇਂ ਗਰਭ ਵਿੱਚ ਪ੍ਰਾਣ ਆਧਾਰ ਸੀ ਨਾ ਉਹ ਪ੍ਰਭਾਵ ਹੈ ਇਸ ਸਾਸਤਰ ਨੂੰ ਉਹ ਪ੍ਰਾਣ ਆਧਾਰ ਬਣਨਾ ਸੀ ਗਰਭ 'ਚ ਉਹ ਸ਼ਬਦ ਉਹਨਾਂ ਜਦੋਂ ਨਾ ਜਿਹਨਾਂ ਦਾ ਰੁਗੀ ਤਾਂ ਇਹ ਜੁੜਨਾ ਸੀ ਕਿਤਰਾ ਹੀ ਹੋਦਾ ਰਿਹਾ ਕਿ ਉਹ ਕਹਿ ਰਿਹਾ ਵੀ ਗੁਰਮਤਿ ਤੋਂ ਮੇਰੇ ਪ੍ਰਾਣਾਂ ਨਾਲ ਰਹਾ ਇਹਦਾ ਮਤਲਬ ਉਹ ਤੋਂ ਸਾਰ ਨੇ ਸਾਰ ਨਹੀਂ ਚੱਲਦਾ ਅਧਾਰ ਪ੍ਰਭੂ ਦਾ ਹੈ ਸਾਰ ਹੀ ਚੱਲਦਾ ਸੱਜ ਜਿਹੜਾ ਕਹਿ ਰਿਹਾ ਉਹ ਤੋਂ ਬਾਹ ਸਰੀਰ ਦਾ ਆਧਾਰ ਉਹ ਆਪ ਕਹਿ ਰਿਹਾ ਹਸ ਕਰ ਸਰੀਰ ਦਾ ਆਧਾਰ ਜੋਤ ਹੈ ਜੋ ਜੋ ਦਾਦਾ ਹਰਿ ਸਰੀਰ ਹਰੀ ਦੀ ਅਸੀਂ ਪੁੱਠੇ ਮਨ ਨਹੀਂ ਬੈਠਿਆ ਗੱਲ ਸਾਡੇ ਕਰਕੇ ਸਰੀਰ ਹੈ ਸਿਰ ਕਿਥੇ ਦਾ ਇਹ ਮੁਸਕੇ ਜਾਂਦਾ ਜਾਂ ਜੋ ਨਿਕਲ ਜਾਂਦੀ ਜੋਤ ਕਰਕੇ ਸਿਰ ਬਚਿਆ ਹੋਇਆ ਸਿਰ ਕਰਕੇ ਅਸੀਂ ਨਹੀਂ ਬਚਿਆ ਹੋਇਆ ਗਲਤ ਹੈ ਆਹੀ ਤਾਂ ਗੱਲ ਹੈ ਸਾਰੀ ਉਹ ਉਹ ਸਰੀਰ ਦਾ ਕੱਪੜਾ ਉਹ ਨਾ ਜਰ ਬਦਬੂ ਨਹੀਂ ਛੜਦਾ ਜਨਨ ਦੇ ਵਿੱਚ ਅਸੀਂ ਆ। ਇਹ ਤਾਂ ਬਦਬੂ ਛੜ ਜਾਂਦਾ ਜਦ ਇਹਦਾ ਆਧਾਰ ਸਾਡੇ ਦਿਮਾਗ ਤੇ ਆਪਸਾ ਸਾਹ ਪ੍ਰਾਣ ਖਾਤੇ ਵਯੂ ਉਹਨਾਂ ਨੇ ਸਿੱਧਾ ਨੇ। ਉਹ ਜਿਹੇ ਦਬਾਵੇ ਫਜ਼ੀ ਗੱਲ ਆ ਉਹ ਕੱਢ ਰਹੀ ਹੈ ਗੁਰਬਾਣੀ ਇਹ ਪ੍ਰਾਣ ਦਾ ਨਹੀਂ ਹੈ ਇਹ ਸਰੀਰ ਦਾ ਆਧਾਰ ਹੈ ਸਿਰਫ ਹਾਂ ਸਰੀਰ ਜਿੱਥੇ 기ਦਾ ਆ ਰਾਂ ਅਗਰ ਤੇਰੀ ਜਿੱਥੇ 기ਦਾ ਆ ਰਾਂ ਤੂੰ ਤਾਂ ਮਰੇ ਤੇਰਾ ਤਾਂ ਕਿੱਦੋਂ ਆਈ ਦਾ ਫਿਰ ਬਸ ਉਹ ਹਿੜ ਫੇਰ ਗੱਲ ਦਾ ਗੱਲ ਤੇ ਹਿੜ ਫੇਰ ਹੈ ਤਾਂ ਇਹ ਨਾ ਉਹ ਮਰਨ ਦਾ ਨਹੀਂ ਤਾਂ ਪਤਾ ਲੱਗਿਆ ਤਾਂ ਹੀ ਇੱਥੇ ਹੀ ਤਾਂ ਕਿਹਾ ਫਰਤਾ ਮਰਤਾ ਜਗੁੰਮਾ ਵਰਤੀ ਨਾ ਜਾਣੇ ਕੋਏ ਆਈ ਤਾਂ ਗੱਲ ਹੈ ਸਰੀਰ ਦਾ ਆਧਾਰ ਆਤਮਾ ਹੈ ਆਤਮਾ ਦਾ ਆਧਾਰ ਸਰੀਰ ਨਹੀਂ ਹੈ ਕੱਪੜੇ ਦੀ ਲੋੜ ਹੈ ਜੇ ਕਪੜਾ ਪਹਿਨਣ ਵਾਲਾ ਹੋਇਆ ਜਾਵੇ ਜੇ ਕਪੜਾ ਪੈਨਣ ਵਾਲਾ ਹੈ ਤਾਂ ਹੀ ਕਪੜਾ ਤਿਆਰ ਹੋਇਆ ਨਹੀਂ ਸੂਤ ਦਾ ਰੋਜੇ ਉੱਥੇ ਸੀ ਕਪੜਾ ਦਾ ਕੋਈ ਬਣਾਇਆ ਨਹੀਂ ਕਿ ਸਰਦੂ ਤੁਸੀਂ ਆਪਣੇ ਇੱਕ ਜੋਦ ਇੱਕਾ ਮੇਰੀ ਕਿੰਨਾ ਹੋਏ ਹੋਵੇ ਨਾ ਹੋਵੇ ਜੋਦ ਵੀ ਹੋਊਗੀ ਮੈਂ ਸਿੱਧੇ ਹੋਏ ਨਾ ਹੋਏ ਸ੍ਰੀ ਹੋਵੇ ਨਾ ਹੋਵੇ हां ਇੱਕ ਹੋ ਗਈ ਹੋਏ ਹੈ ਨਾ ਹੋਵੇ ਸੋ ਇੱਥੇ ਕਿ ਜੇ ਹੋਇਆ ਤਾਂ ਸਾਧਾ ਵਿੱਚ ਚੱਲਦਾ ਨਾ ਜੋਦਿਕ ਹੋ ਗਈ ਸਾਹ ਨਾਲ ਸਰੀਰ ਹੈ ਜਿਹੜਾ ਉਹ ਜਿਉਂਦਾ ਹੈ ਸਾਹ ਨਾਲ ਆਤਮਾ ਵੀ ਜਿਉਂਦੀ ਸਰੀਰ ਵਾਸਤੇ ਸਾਹ ਨਹੀਂ ਰੋੜ ਹੈ ਉਹ ਆਤਮਾ ਕੋਲ ਦੀ ਪ੍ਰਾਣ ਦਾ ਰਾਂਗ ਆਤਮਾ ਦਾ ਪ੍ਰਾਣ ਦਾ ਉਹ ਹੈ ਸਰੀਰ ਦਾ ਨਹੀਂ ਹੈ ਅਸੀਂ ਸਰੀਰ ਵਾਲੇ ਪ੍ਰਾਣ ਨੂੰ ਆਤਮਾ ਦੇ ਪ੍ਰਾਣ ਮੰਨ ਲਏ ਆ ਗਲਤੀ ਕਰ ਰਹੇ ਹਾਂ ਆਤਮਾ ਦੇ ਪ੍ਰਾਣ ਬਾਇਓ ਨਹੀਂ ਹੁੰਦੇ ਔਰ ਸਦ ਗੋਸ ਵਿੱਚ ਹੀ ਤਕਲੀਰ ਹੈ ਪਵਨ ਤਹਾਰਾ ਸਖਾਇ ਸਰੀਰ ਜਿਹੜੀ ਆਤਮਾ ਦਾ ਪ੍ਰਾਣ ਵਾਯੂ ਨਹੀਂ ਹੁੰਦਾ ਵਾਯੂ ਜੜ ਹੈ ਆਤਮਾ ਚੇਤਨ ਹੈ ਜੜੀ ਜੜ ਹੋਦਾ ਦਾ ਆਸਰਾ ਚੇਤਨ ਹੈ ਚੇਤਨ ਦਾ ਆਸਰਾ ਜੜ ਨਹੀਂ ਹੈ ਆਦੇ ਕੋਠੇ ਖੜੀ ਐ ਪੱਖਾ ਖੜਾ ਸਾਧਿਆ ਅਸਰ ਖੜਾ ਚੇਤਨੈਗੜਾ ਆਇਆ ਨਾ ਅਸਰਾ ਦੇ ਕੇ ਤੂੰ ਚੇਤਨੈਗੜਾ ਅਸਰਾ ਹੋਇਆ ਆ ਕੋਡਾ ਕਿ ਨਾ ਬੜਾਇਆ ਨਾ ਛੱਤ ਪਾਈ ਚੇਤਨੈ ਭਾਈ ਤਾਂ ਜਿਦਨੇ ਅਸਰਾ ਚੇਤਨੋਂ ਤੋਂ ਦੇ ਖੜਾਇਆ ਸੱਤ ਪੱਖਾ ਹੀ ਵੱਡ ਜਾਂਦਾ ਕੋਠੇ ਹੀ ਵੱਡ ਜਾਂਦਾ ਕਮਰਾਈ ਵੱਡ ਜਾਂਦਾ ਪੱਖਾ ਹੀ ਹੁੰਦਾ ਸਭ ਦਾ ਇਹ ਆਧਾਰੇ ਚੇਤਨ ਅਸੀਂ ਜੜ ਨੂੰ ਆਧਾਰ ਚੇਤਨ ਦਾ ਮੰਨ ਲਿਆ ਇਸ ਕਰਕੇ ਉਦੋਂ ਮਨ ਜਦ ਵੱਲ ਰੋਦੇ ਆ ਨਾ ਗੱਲ ਹੋਏ ਦਰਨਾ ਜਾਵੇ ਵਿਗੜ ਜਾਵੇ ਨਾ ਮੇਰਾ ਗੁਜ਼ਾਰਾ ਹੀ ਨਹੀਂ ਇਹ ਬ੍ਰੇਡ ਬਾਸ਼ ਮੰਨ ਲਿਆ ਆਪਾਇਆ ਨੂੰ ਆਧਾਰ ਆਪਣਾ ਮੰਨ ਲਿਆ ਬਾਯਾ ਗਈਦਾ ਬ੍ਰੋ ਮਨ ਉਹ ਗਿਆਨੇ ਕਾਇਆ ਉਸ ਕਾ ਪ੍ਰੀਤ ਪਿਆ ਹੀ ਛੱਡ ਜਾਏ ਹਾਂ ਉਹ ਕਾ ਨਾ ਮਦ ਹੁਕਮੇ ਮਦੋ ਕਾਇਆਦਾਰ ਜਦੋ ਦੀ ਭਾਰਤ ਆ ਲਾਗੋਗਾ ਨਾ ਹੁਕਮੇ ਪਤਾ ਮਾਤਾ ਅਕੀ ਕਮਾ ਤਲੂ ਇਸ ਕਰਕੇ ਹੁਕਮ ਜਿਹੜਾ ਹੈਗਾ ਉਹ ਸੁਪਰੀਮ ਜੇ ਹੁਕਮਾਂ ਨੂੰ ਸੁਣਦਾ ਉਹਦੂ ਤਾਂ ਉਹਦਾ ਜੀਵਨ ਚੱਲਦਾ ਹੈ ਉਹਦਾ ਜੀਵਨ ਚੱਲਦਾ ਹੈ ਜੇ ਹੁਕਮਾਂ ਤੋਂ ਬੰਦ ਹੋਇਆ ਸੁਣਨਾ ਸਮਾਧ ਹੋ ਜੂਜਾ ਦੇ ਐਤਤਨੇ ਚੁੱਕ ਜਿਆਦਾ ਹੀ ਚੱਲਦਾ ਨਾ ਹੁਕਮ ਨਾਲੇ ਹੁਕਮ ਬੰਦ ਤੰਨੇ ਜੋ ਖਤਮ ਜਦੋਂ ਉਹਨੇ ਸੁਣਨਾ ਚਲਾਗਾ ਸੁਣਨਾ ਸਮਾਜ ਪੂਰ ਆਪਣੇ ਸੁਣ ਸਮਾਜ ਚਲਾ ਜਾਣਾ ਜੀਵਨ ਖਤਮ ਹੋ ਜਾਵੀ ਆਗਲਾ ਹੋਰ ਇਹ ਸਮਝ ਹਾਂ ਕੋਈ ਸਰੀਰ ਸਾਡਾ ਉਦੋਂ ਜਿਹੜਾ ਸਰੀਰ ਹੈ ਉਹ ਕੌਣ ਹੈ ਉਹ ਸ਼ਬਦ ਜਿਹੜਾ ਹੈ ਗੁਰੂ ਦਾ ਸਰੀਰ ਹੈ ਦੇਹੀ ਗਿਆ ਉਹ ਗੁਪਤਾ ਦੇਹੀ ਉਹ ਦੇਹੀ ਗੁਪਤਾ ਆ ਦੇਸੀ ਹੈ ਬਦੇਹੀ ਬਾਹਰ ਵਾਲੀ ਅਸਾ ਦੋਏ ਹੋ ਗਿਆ ਹੁਣ ਜੋ ਦੇਹੀ ਦੀ ਰਹੀ ਹੈ ਜੋ ਦੇਹੀ ਦੇਹੀ ਕਿਹਾ ਤਾਂ ਤਰਵਰ ਦੇਹੀ ਹੈ ਤਰਵ ਰੂਪੀ ਰੰਗ ਹਾ ਰਾਮ ਦੇਹੀ ਨਹੀਂ ਆ ਰਾਮ ਦੀ ਦੇਹੀ ਸਰਵਰ ਸ਼ਬਦ ਹੈ ਜੋਤ ਦੀ ਤੇ ਹੀ ਜਾਣਾ ਉਹ ਨਾਲ ਚਲਦਾ ਕਜਾ ਜਰੂਰ ਉਹਦੇ ਅਪ੍ਰਿਛਾ ਉਹਦੀ ਇੱਛਾ ਹੀ ਉਹਦੀ ਤੇ ਹੀ ਜੋਤ ਦਾ ਸਾਰਾ ਦੀ ਜਹੀ ਜੋਤ ਰਹੇ ਸ਼ਬਦ ਨਾ ਰਹੇ ਫਿਰ ਇਹ ਵੀ ਜਦ ਸਭ ਸੁਭਾਗ ਮੈਂ ਉਹ ਸਮਾ ਹੋ ਕਰਨਾ ਕਹਿੰਦਾ ਉਹਨਾਂ ਦਾ ਸਮਾਦ ਲਗਾਏ ਦਾ ਸਾਰੇ ਨਾਮ ਕਮਜ਼ ਘਮ ਹੋ ਜੇ ਹੋਰ ਵੀ ਨਾ ਹੋਵੇ ਤਾਂ ਦੋ ਪਦਾਰਥ ਗਾਇਬ ਹੋ ਜਾਣਗੇ ਸਿਰ ਛੱਡਾਂਗੇ ਜੇ ਪਾਣੀ ਦੇ ਛੇ ਛੱਡ ਗਏ ਸ਼ਬਦ ਵਿੱਚ ਸਮਾਇਆ ਨਹੀਂ ਹੋਇਆ ਉਸ ਵੇਲੇ ਫਿਰ ਕੋਰ ਸ਼ਬਦ ਸਮਾਵੇ ਜੇ ਸਮਾਇਆ ਹੋਇਆ ਨਹੀਂ ਸਿਰ ਛੱਡਿਆ ਜੋ ਆਬਜੂਲੇਟੇਰ ਕਰ ਜਾਂਦੀ ਹੈ। ਜਦ ਇਹ ਲਾਈਟ ਕਰ ਜਾਂਦੀ ਹੈ ਨਾ ਉਹ ਜਾਂਦੀ ਹੈ। ਜੇ ਉਹ ਸਟਟਰ ਆਈ ਉਹ ਸੇ ਉਹ ਨਗੜੀ ਜਿਉ ਕੇ ਚ ਲੱਗਦਾ ਫਿਰ ਜੇ ਉਹ ਟ੍ਰਿਪ ਕਰ ਗਈ ਫੇਰ ਤੇ ਦੋ ਬਜ਼ਾਰਤ ਘਰ ਹੋ ਜਾਣਗੇ। ਹਾਂ। ਜੇ ਤਾਂ ਅੱਜ ਖੜਾ ਉਹ ਰੂਬੇ ਇਹ ਕਬੂਲ ਜਲ ਕਾਣ ਚਾਹਤ ਰੂਕ ਫੋ ਉੱਥੇ ਆ ਜੂ ਇਹ ਤੋਂ ਥੱਲੇ ਨਹੀਂ ਹੱਸ ਕੋਦੇ ਖਾਸਤਾ ਉਹੀ ਬਹੁਤ ਘੱਟ ਹੈ ਇਹੋ ਅੰਦਰ ਵੇ ਤਾਂ ਨਹੀਂ ਜੇ ਕੋਈ ਰਬਾ ਪਾਤੀ ਗੇਰੂ ਘੱਟਾ ਪੈਰੇ ਆ ਅੱਖਰ ਕਰੋੜਾਂ ਪਿਆਰ ਨੂੰ ਭੇਗਾ ਨਹੀਂ ਅਗਰਾਂ ਤੇ ਤੇਰੇ ਕੋਲ ਆ ਜਾਣਾ ਕੋਈ ਉਹਦੇ ਤਨ ਕਹਦਾ ਵੇਕਰ ਉਹਨੂੰ ਪੁੱਛ ਕੇ ਦੇਖਣਾ ਉਹ ਤੋਂ ਉਹਨੂੰ ਪਗਾ ਆਇਆ ਜਾਂ ਕੁਛ ਹੁਣ ਤਾਂ ਵੇਸੇ ਪੰਜਾਬੀ ਚ ਸਿੱਧੀ ਜਿਹੀ ਗੱਲ ਆ ਪੱਤੀ ਦੇ ਲਾਲ ਤਾਂ ਸੁਣੀਆਂ ਹੋਈਆਂ ਨੇ ਇਹ ਨਕਸ਼ਾ ਸਾਰਾ ਦੇਖ ਕੇ ਵੀ ਜਿਹੜੀ ਬੇਨਾ ਬਣੀ ਰਹੀ ਹੈ ਸਰੀਰ ਦੇ ਛੱਡਦੀ ਜਿਹੜੀ ਆ ਉਹ ਇਹਦਾ ਬੰਦਲਾ ਕੋਈ ਆਇਆ ਆਧਾਰ ਮੰਨਿਆ ਨਹੀਂ ਹੋਇਆ ਸਮਝ ਆਈ ਨਹੀਂ ਹੋਈ ਕਲੀਅਰਲੀ ਗੱਲ ਸਮਝੀ ਹੋਈ ਕ੍ਰੋਸ ਜਿਹੜਾ ਹੈ ਕ੍ਰੋਸ ਗਿਆ ਸਮਝਿਆ ਫਿਰ ਜਿੰਨਾ ਸੀ ਬਗਾਂ ਉਹ ਲੈ ਲੈ ਕੱਟੇ ਅਗਰੀ ਗੱਲ ਜਿਹਾ ਉਹਦਾ ਜੋ ਤੱਤ ਨਹੀਂ ਖੜਿਆ ਅਜੋ ਉਹਦਾ ਵੀ ਤੱਤ ਤਾਂ ਬੜਾ ਤੇਲ ਤੱਤ ਹੈ ਇਹ ਗੁਣ ਬਦਾਵੇਂ ਨੇ ਜੇ ਤੁਹਾਡੇ ਕੋਈ ਲੈ ਜਾ ਲੈ ਵੀ ਲੈ ਤਾਂ ਗੁਣ ਮੈਂ ਗਿਆਨ ਉਹ ਆਪਤ ਹੋਏ ਜੇ ਮੈਂ ਗਰੀ ਦੇ ਵਿੱਚੋਂ ਤੇਲ ਪ੍ਰਾਪਤ ਹੋਣਾ ਅਜੇ ਤਾਂ ਦੂਰ ਦੀ ਗੱਲ ਹੈ ਗੁਲਾਮ ਪ੍ਰਾਪਤ ਹੋਣਾ ਵੀ ਗੱਲ ਅੱਗੇ ਹੈ ਫਿਰ ਕਿਹਦੀ ਗੱਲ ਹੈ ਉਹ ਤਾਂ ਵਾਅ ਫਿਰ ਰੋਸ਼ਨੀ ਹੈ ਤੇਲ ਦੇ ਵਿੱਚ ਬਾਸ ਹੋ ਗਿਆ ਦਮ ਉਹ ਰੋਸ਼ਨੀ ਬੱਚੀ ਹੈ ਉਹ ਉਹਦੇ ਤੇਲ ਦੇ ਮਜੇ ਦੂਏ ਨੂੰ ਦੇਣੀ ਹੈ ਤਾਂ ਦੂਏ ਪਾਸ ਸਵੇਰ ਵਤੀ ਚਾਹੀਦੀ ਹੈ ਫੇ ਵਤੀ ਤੇਲ ਉਹਨੂੰ ਧੋਪ ਗਿਆ ਵਤੀ ਕੀਤੀ ਰੋਸ਼ਨੀ ਦੇ ਵਿੱਚ ਆ ਉਹਨੂੰ ਨਹੀਂ ਜਾਏਗੀ ਰੋਸ਼ਨੀ ਰੋਸ਼ਨਾ ਉਹ ਤਾਂ ਸਾਫਤ ਕਰਦਾ ਮੇਰੇ ਰੋਸ਼ਨੀ ਉਹ ਤਾਂ ਦਾ ਤੇ ਹੁੰਦਾ ਮੇ ਤਾਂ ਤੇਰਾ ਚਰਹਾਟ ਹੋ ਨਾਪਜਾ ਨੂੰ ਨਾ ਚਾਨਣ ਤਾਂ ਸਭ ਤੇ ਹੁੰਦਾ ਫੇਰ ਰੋਸ਼ਨੀ ਸਭ ਤੇ ਹੁੰਦੀ ਹੈ ਪਰ ਜਲਣਾ ਤੇ ਇਹਨੂੰ ਕੋਊਗਾ ਜੇ ਇਹਨਾਂ ਨਾਲ ਨਹੀਂ ਬਊਗਾ ਕੋਈ ਨਹੀਂ ਸਮਝਣਾ ਹੋਊਗਾ ਫੇਰ ਕਰ ਮੈਂ ਜਲਾਮਲਾਂ ਹੰਦੇ ਚੰਦਾ ਚੰਨ ਵੀ ਕਰਦਾ ਇਸ ਕਰਕੇ ਚਿੰਤਾ ਦੇ ਨਾਮ ਨਹੀਂ ਤੁਸੀਂ ਚਾਨਣ ਹੀ ਦੇ ਸਕਦੇ ਸਰਬ ਕੀ ਓ ਚੰਨ ਨਹੀਂ ਦੇ ਸਕਦੇ ਉਹ ਸੱਚ ਕਰਨ ਵਾਲੇ ਚਿੰਤਾ ਦੇ ਬਿਨਾਂ ਹੀ ਦੇ ਸਕਦੇ ਨੇ ਚਿੰਤਾ ਦੇ ਬਿਨਾਂ ਜਿਵੇਂਗਾ ਤੁਸੀਂ ਜਿੰਤਾ ਕਰੋ ਥੋੜੀ ਜਿੰਨਾ ਸਾਧੂ ਏ ਰੁ ਕਰ ਇਹ ਨੇ ਤੂੰ ਕੱਲਾ ਅਸੀਂ ਨਾਲਿਆਂ ਤੇ ਤੂੰ ਫੇਰ ਨਾ ਕਰ ਇਹ ਤਾਂ ਇਹਨੂੰ ਗਿਆ ਬਿਡਾ ਨਾ ਨਹੀਂ ਤੂੰ ਇਹ ਗੱਲਾਂ ਉਹਨਾਂ ਨੇ ਚਿੰਤਾ ਕਰਦੀਆਂ ਆ ਸਰਬ ਦੀ ਚਿੰਤਾ ਉਹਨਾਂ ਨੂੰ ਆ ਆ ਤੁਮ ਕਹਤਾ ਹੈ ਤੈਨੂੰ ਜਿੰਦਾ ਗੱਲ ਨਹੀਂ ਹੋੜ ਸਾਡੇ ਹੋਗੋ ਨੇ ਬਿਨਾਂ ਤੇਰਾ ਕੱਛੀ ਵਗਾੜ ਸਕਦਾ ਕੋਈ ਹੀ ਬਣੇ ਕਹਦੀਏ ਤੇ ਤੈਨੂੰ ਵੀ ਜਿੰਦਾ ਤੂੰ ਸੋਨਾ ਦਾ ਮਰਗ ਬਣ ਕੇ ਰਾਮ ਸਿੰਘ ਦੇ ਮੂਹਰੇ ਬਚਿਆ ਫਿਰ ਜਿਨਾਜਤ ਤੇ ਲਗਣਾ ਨਹੀਂ ਇਹ ਉਹਨਾਂ ਜਦ ਜਹਾਜ਼ ਰੁਗਮਾਨਾ ਤੇ ਤੇ ਲਗਣਾ ਹੈ ਇੰਦੇ ਚੌਕਵਾਣਾ ਖੈ ਤੂੰ ਛੱਕ ਜੂ ਧਰਿਆ ਲਗਣਾ ਮਾਰਿਆ ਉਹਨੇ ਕਿ ਧਰਿਆ ਉਰ ਆ ਲਗਣਾ ਤੇਰੇ ਤੇ ਆਪਾਂ ਪੂਰੇ ਛੇਰੇ ਬੈਠਾ ਹੂੰ ਚਿੰਤਾ ਹਰ ਵਕਤ ਜੀ ਰਹੇ ਹਾਂ ਚਿੰਤਾ ਹਰ ਵਕਤ ਜੀ ਰਹੇ ਹਾਂ ਚਿੰਤਾ ਹਰ ਵਕਤ ਉਹ ਚਿੰਤਾ ਹੋਤ ਰਹਾਂਦੀ ਹੈ ਇਹਦੇ ਨਾਲ ਤੁਸੀਂ ਜੀ ਰਹੇ ਜਿਵੇਂ ਕੋ ਬਿਆ ਕਰਦਾ ਜਿਵੇਂ ਗਰੀਬ ਦੀ ਕੁੜੀ ਦਾ ਵਾਦ ਪਿਆਰ ਉਹ ਤਫੜਾ ਸਾਹਿਬ ਦਾ ਆਦਮੀ ਸਮਾਇਦਾ ਮੱਝੀ ਹੋਗੀ ਕਿਆ 10 ਕੁੜੀਆਂ ਆਗਿਆ ਕਰਦਾ ਜਿੰਤਾ ਤਾਂ ਉਹਨੂੰ ਪਰੋਸਿਸ਼ਤਾ ਹੈ ਜਿਹੀ ਹੈ 27 ਰੁਪਏ ਹਰ ਗੇ ਰੁਪਈਆ ਤਾਂ ਚਲੇ ਆਲੇ ਨੇ ਪਰ ਉਹ ਰੁਪਈਏ ਜਾਣ ਦੀ ਜਿੰਤਾ ਨਹੀਂ ਹਰ ਉਹ ਤਾਂ ਨਰਜੀ ਮੈਂ ਜੰਗੇ ਤੋਂ ਪੈਸੇ ਲੱਗ ਰਹੇ ਨੇ ਇਸ ਗੱਲ ਦਾ ਤਾਂ ਉਹ ਹੋ ਵੀ ਐ ਖੁਸ਼ੀ ਵੀ ਐ ਪਰ ਉਹਨਾ ਕੁਝ ਘਾਟਾ ਵਾਧਾ ਟਾਈਮ ਤੇ ਹੋ ਜਾ ਕੋਈ ਕੰਮ ਇਹ ਨਾ ਪੈ ਜਾਏ ਵੀਰੋ ਨਾ ਪੈ ਜਾਏ ਠੀਕ ਹੈ ਨਾ ਅਰੇ ਹਣੇ ਪਤਾ ਹੋਈਆ ਨਾਟ ਪੈ ਤਾ ਹੋ ਵੀ ਹੋ ਗਿਆ ਅਰੇ ਇਹ ਕਿਹਦਾ ਹੋ ਗਲੀ ਚ ਉਹ ਹੋਹੀ ਜੀ ਹੋ ਚੰਤਾ ਹੀ ਫਰਕ ਹੈ ਬ੍ਰਹਮ ਗਿਆਨੀ ਇਹ ਉੱਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਣਾ ਸਕਦਾ ਫੇਟੜੀਆ ਦੁਨੀਆ ਉਹਦੀ ਬੜਾਈ ਕਰਦੀ ਹੈ ਇਹ ਚਾਹਤ ਨੂੰ ਅਰਜੀ ਵੀ ਮਿਲਦੀ ਹੈ ਉਹਦੇ ਨਾ ਕੋਈ ਕੰਮ ਨਹੀਂ ਕਿੱਥੋਂ ਮਿਲਦੀ ਹੈ ਦੁਨੀਆ ਜਾਸ ਕਰਦੀ ਕਿ ਜੀ ਜਦੋਂ ਮੈਂ ਇਹ ਤੋਂ ਦਾਇ ਤੇ ਇਹ ਹੋਏ ਤੇ ਇਸ ਵੀ ਮਾਰ ਆ ਇਹ ਛੋਟਾ ਸੱਚਾ ਸਾਹਿਬ ਜੀ ਸੱਚਾ ਆ ਉਹ ਫੇ ਤਾਂ ਹੀ ਤਾਂ ਛੱਡ ਦੇ ਦੀ ਇੱਕ ਪੈ ਜਾਂਦਾ ਵਿਆਹ ਤਾਂ ਹੁਣ ਬਰਦੀ ਆ ਖਾਣ ਨੂੰ ਲੱਡੂ ਇਹ ਹਾਲੋ ਝਟੋਪਰੇ ਗਾਂ ਦਾ ਪਤਾ ਕੋਈ ਨਹੀਂ ਗਾਂ ਵਾਲੇ ਦਾ ਜਿੱਥੇ ਜਿੱਥੇ ਕਿੰਨਾ ਕੰਮ ਤਸੱਲੀ ਦੀ ਹੋ ਜਾਂਦੀ ਹੈ ਹਾਂ ਅਚ ਚੜਦਾ ਹੈ ਸੁਣੀ ਜਾਂਦਾ ਵਾਂ ਜੇ ਉਹੀ ਕਰ ਦੋਖ ਮੰਦੀ ਜਾ ਰਹੀ ਹੈ ਹਾਂ ਨਹੀਂ ਉਹ ਸੱਚ ਖਾਣ ਤੇ ਬਣਾ ਨਾ ਕਰਦੀ ਉਹ ਸੱਚ ਖਾਣ ਤੇ ਛੇੜੀ ਪੈਦਾਮਤ ਕਰਦੀ ਉਹ ਹੈ ਦੁਨੀਆ ਗੇ ਜਾਂ ਕਿਸੇ ਜਦ ਕਹਿੰ ਕੇ ਇਹ ਜੜੀ ਜਗ ਜਲਿਆ ਇਹ ਜਿਹੜਾ ਜਗ ਜਲਦਾ ਹੈ ਇਹਨਾਂ ਦੀ وجہ ਨਾਲ ਜਲਦਾ ਆ राजे ਮਹਾਰਾਜੇ ਬੜੇ ਬੜੇ ਪੈਦਾ ਹੋਣੇ ਬੜੇ ਬੜੇ ਗੁਰੂ ਪਾਣੇ ਦੇਖੀਏ ਤਾਂ ਬ੍ਰਿਟਿਸ਼ ਹਨ ਤੇ ਨਾਮ ਬਸਾਉਣ ਇਹਨਾਂ ਨਾਮ ਪਸਾਰੇ ਹਸਲ ਚਾਹੇ ਰਾਮਚੰਦਰ ਹੋਵੇ ਚਾਹੇ ਕ੍ਰਿਸ਼ਨ ਹੋਵੇ ਨਾਮ ਦੀ ਚਰਚਾ ਕਿਤੇ ਵੀ ਚੱਲਦੀ ਹੈ ਮਹਾਪਾਸ ਨਾਮ ਦੀ ਚਰਚਾ ਹੋਉਂਦੀ ਹੈ ਉਹ ਬਦਲਦੀ ਗੱਲ ਜ਼ਰੂਰ ਆਉਂਦੀ ਆ ਪਰ ਬਦਲਦੀ ਗੱਲ ਠੀਕੇ ਆਉਂਦੀ ਵੀ ਭਗਤ ਸੀ ਆਪਸ ਕਿਉਂ ਦੇ ਕੋਲ ਬਦਰ ਕੋਈ ਆਇਆ ਕ੍ਰਿਸ਼ਨ ਦੀ ਇੰਨੀ ਗੱਲ नहीं ਆ ਵੀ ਬਦਲਦਾ ਉਹਨੇ ਸਾਗ ਵੀ ਖਾ ਲਿਆ ਪ੍ਰਹਿਮ ਨੂੰ ਬਿਸਤਾਰ ਵੀ ਕੀਤਾ ਬੇਜਮਾਨਾਂ ਨੇ नहीं ਬਦਰ भी ਕਿਹੜੀ ਭੂਟੀ ਸੀ ਕੀ ਚੀਜ਼ ਸੀ ਕ੍ਰਿਸ਼ਨ ਦੋਹਦ ਆਇਆ ਕ ਇਹਦੇ ਇਸ ਕੈਪਟਨਿੰਗ ਹੋ ਗਿਆ ਚੈਪਟਰ ਹੋਰ ਬੋਲ ਕੇ ਰੱਖੇ ਪਟਾ ਚੈਪਟਰ ਇਹ ਆ ਵੀ ਪਣਵਾ ਵਲ ਆ ਜੋਤਾ ਹਾਂ ਉਹ ਚੈਪਟਰ ਰੱਖਿਆ ਹੋਇਆ ਸੀ ਉਧਰ ਰਾਵਣ ਨੂੰ ਮਾਰਦੇ ਉਹਦੇ ਭਾਈ ਜੂਲ ਆ ਜੋਤਾ ਚੈਪਟਰ ਦੁਨੀਆ ਦੀ ਵੜੀ ਇਧਰ ਰੱਖੇ ਰਾਵਣ ਨੇ ਸੀ ਮਾਰਿਆ ਉਸ ਵੜੇ ਜਿਹੜੇ ਰਾਈਟਰ ਸੀ ਉਹ ਕੀ ਕਰ ਰਹੀ ਸੀ ਹਾਂ ਦਾ ਆਈਡੀਆ ਕੀ ਸੀ ਕੌਣ ਕਰਵਾ ਰਿਹਾ ਸੀ ਇਹ ਆਪਾਂ ਵਿਚਾਰਨ ਵਾਲੀ ਗੱਲ ਹੈ ਹਾਲਾਤ ਕਹੇਦੇ ਸੀ ਜਦੋਂ ਇਹ ਦਸਤ ਲਿਖੇ ਗਏ ਦੇ ਫਿਰ ਤਾਂ ਭੁੱਖ ਮੋੜ ਰਹੇ ਸੀ ਲੋਕੋ ਨੂੰ ਬੇਦਾਲੇ ਫਿਰ ਚੁੱਪ ਕਰ ਬੇਤਾ ਬ੍ਰੋ ਸ਼ੁਰੂ ਕਰਤਾ ਉਹ ਜੀ ਲੋਕ ਜਮਾਨਾਸ਼ਾਲਿਆਂ ਨੂੰ ਆ ਵੀ ਆ ਬੇਕਾਰ ਇਵੇਂ ਲੋਗ ਲੱਗੇ ਹੋਣਾ ਨਾ ਮਤਲਬ ਬਹੁ ਹਾਲੇ ਕਮਾ ਤਾਂ ਉੱਪਰ ਘਰ ਉੱਠੇ ਕੋਈ ਕਵਾਜ ਉੱਠ ਗਈ ਇਹ ਦੋ ਵੀ ਕੰਮ ਹਾਲਾਂਕਿ ਕੰਮ ਬੰਦ ਕਰਨ ਨੂੰ ਨਹੀਂ ਲੋੜ ਹੈ ਕਹਾਣੀਆਂ ਬਣਾਈਆਂ ਹੋਈਆਂ ਨੇ ਲੋਕਾਂ ਨੇ ਗਲਤ ਕਹਾਣੀਆਂ ਬਣਾਤੀਆਂ ਇਹਨਾਂ ਨੇ ਜਾਣ ਕੇ ਅਗਯੋ ਸੁਖਵੰਤਾ ਪਿਆ ਛਾਂਵੇਂ ਲੱਤ ਲੱਤਰੀ ਉਹਦੀ ਗੱਲ ਹੁਣ ਉਹ ਕਹਿੰਦਾ ਤੂੰ ਸਾਰਾ ਦਿਨ ਪਿਆਰਾ ਨਾ ਉੱਠੋ ਕੰਮ ਕਰੇ ਕਰ ਖਾਵੇ ਫਿਰ ਕਿਉਂਗਾ ਤੇ ਤੂੰ ਵਿਆਹ ਕਰਾ ਲਈ ਫਿਰ ਤੂੰ ਫਿਰ ਕਿਉਂਗਾ ਫਿਰ ਬੱਚੇ ਹੋ ਜਾਣਗੇ ਫਿਰ ਤੂੰ ਘਰ ਬਣਾ ਲਈ ਤੇ ਤੇਰੀ ਬੜੀ ਇੱਜ਼ਤ ਤੂੰ ਫਿਰ ਕਿਉਂਗਾ ਫਿਰ ਟਾਂਗ ਧਰ ਕੇ ਸੌਂਈਂ ਕਹਿੰਦਾ ਉਹ ਤਾਂ ਮੈਂ ਪਿਆ ਨਹੀਂ ਮੈਂ ਕਰਕੇ ਵੀ ਉਹੀ ਕਰਨਾ ਹੈ ਪਹਿਲਾਂ ਹੀ ਆ ਉਹਨੇ ਕੰਮ ਕਰਨਾ ਬੰਦ ਕਰ ਦਿੱਤਾ ਉਹ ਕਹਿੰਦਾ ਉਹ ਕਰੂਗਾ ਉਹ ਹੈ ਸਾਡੀ ਨਾ ਉਹਨੇ ਸੋਚ ਪੁੱਠਾ ਲਿਆ ਬੁੱਢੀ ਸੋਚ ਕਰਦਾ ਤਾਂ ਹੀ ਬਾਣੀ ਆਇਆ ਰ ਹੱਥ ਕਹਿਣਾ ਪਿਆ ਕਬੀਰ ਨੂੰ ਇਹ ਕਬੂਦੀ ਹੈ ਨਾ ਭਗਤਾਂ ਨੇ ਕੰਮ ਕਰਕੇ ਸਭ ਕੁਝ ਪੱਛੇ ਪਾਲ ਕੇ ਜੀਵਨ ਜੀ ਕੇ ਦਿਖਾਇਆ ਇਹ ਇਹੀ ਹੈ ਕੋਈ ਬਾਤ ਹੈ ਵਾਜੀ ਨਹੀਂ ਕਰਦੀ ਸਮਝਿਆ ਨਹੀਂ ਕ੍ਰਿਸ਼ਟੀਆ ਦਾ ਧਰਮ ਹੈ ਇਹ ਕ੍ਰਿਸ਼ਟੀਆ ਦਾ ਧਰਮ ਹੈ ਕਿ ਰਸਤਪਰਦਾਮ ਦਾ ਮਤਲਬ ਤਾਂ ਹੈ ਕਿ੍ਰਿਸਤੀ ਆਦਮੀ ਹੀ ਵਧੀਆ ਧਰਮ ਹੋ ਸਕਦਾ ਨਹੀਂ ਹੋਏ ਨਹੀਂ ਸਕਦਾ ਹੁਣ ਤੁਸੀਂ ਕ੍ਰਿਸਤਪਰਦਾਮ ਦਾ ਅਰਥ ਸਮਝ ਲੋ ਕੀ ਹੈ ਜਿਹੜਾ ਕ੍ਰਿਸਤ ਦਾ ਹੈ ਨਾ ਆ ਸਾਡਾ ਜੀਵਨ ਕ੍ਰਿਸ਼ਤੀ ਜੀਵਨ ਉਹ ਉਹ ਸੰਸਾਰ ਉਹ ਕਿਤੇ ਚੰਗਾ ਜਿਹੜੇ ਨੇ ਵਿਆਹ ਕਰਾਏ ਇਹ ਜੇ ਮੈਂ ਵਿਚੰਤ ਆ ਹੋ ਗਿਆ ਗੋਰਖਨਾਥ ਉਹ ਕਹਿੰਦਾ ਜਿਹੜੇ ਨੇ ਹਿੱਸੇ ਤੇ ਹੋਰ ਹੋਏ ਨੇ ਜਲਦੀ ਸਦਮੇ ਛੱਡ ਉਹਨਾਂ ਦੀ ਉਹਨਾਂ ਨੂੰ ਵਿਆਹ ਉਹਨਾਂ ਨੇ ਖਟਿਆ ਕੁਝ ਵੀ ਨਹੀਂ ਕਿਸੇ ਨੇ ਇਹ ਖਟਿਆ ਤਾਂ ਸਾਬਤ ਕਰੂ ਆ ਸਾਡੇ ਕੋਲ ਕੁਝ ਵੀ ਨਹੀਂ ਉਹਨਾਂ ਦਾ ਰਿਕਾਰਡ ਖੱਟਣ ਦਾ ਚੋੜ ਜੀ ਬੋਲਿਆ ਹੋਇਆ ਮਾਇਬੜੀ ਦਾ ਉਹ ਬੋਲਿਆ ਗ੍ਰੰਥਾ ਜੋ ਨਾ ਬਾਰੇ ਖਟਿਆਰਾਂ ਨੇ ਕੁਛ ਨਹੀਂ ਸੀਰੀਅਸਲੀ ਜੇ ਆਪ ਬਿਚਾਰੀਏ ਜੋ ਪੜ੍ਹੋ ਕਹਾਣੀਆਂ ਜੋ ਸਾਰੀ ਗ੍ਰਿਸ਼ਤੀ ਨੇ ਇਹ ਸਾਰੇ ਬਿਨਾਂ ਹੈ ਜੀ। ਕ੍ਰਿਸ਼ਤ ਧਰਬ ਪ੍ਰਧਾਨ ਕ੍ਰਿਸ਼ਤ ਪ੍ਰਦਾਨ ਤਾਂ ਹੈ ਇਹਦੇ ਬਿਨਾਂ ਤੁਸੀਂ ਕੁਦਰ ਦੇ ਖਲਾਫ ਹੋ ਕੁਦਰ ਦਾ ਤੁਸੀਂ ਉਥੇ ਗਲਤ ਕਰਦੀ ਜਿੰਮੇਵਾਰੀ ਪੱਸੀ ਨੂੰ ਨਿਛੇ ਤੇ ਤੁਸੀਂ ਖਲਾਫ ਹੋ ਗਏ ਤੁਹਾਨੂੰ ਹੁਕਮ ਦੇ ਵਿੱਚ ਹੀ ਜਲਣਾ ਨੂੰ ਆਪਣਾ ਮਨ ਬਣਾ ਲਿਆ ਵੀ ਮੈਂ ਨਹੀਂ ਕਰਦਾ ਲੈ ਤੇਰੀ ਮੱਜੀ ਹੋਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਇਹ ਗੱਲ ਆਈ ਗੱਲ ਆਈ ਉਹ ਤੇ ਜਿਹੜਾ ਸਟੈਂਡ ਗਲਤ ਸਾਬ ਤੋਂ ਗਲਤ ਸਟੈਂਡ ਲੈ ਲੇ ਗਲਤ ਡਿਸੀਜਨ ਲੈਣੇ ਮੈਂ ਬਿਆਨ ਨਹੀਂ ਕਰਾਉਣਾ ਹਾਂ ਉਹ ਬੇੜੇ ਇਹ ਜੇ ਬਹੁਤ ਸੀ ਪਿੱਛੇ ਇਹੀ ਰਾਸ਼ੀ ਦਾ ਸ਼ੁਰੂ ਤੇ ਲੈ ਕੇ ਤੁਹਾਨੂੰ ਕਰ ਕਰ ਕੋਈ ਕਰੇ ਤੁਸੀਂ ਧਰਮ ਤਾਂ ਹੋ ਹੀ ਨਹੀਂ ਸਕਦਾ ਕਰਮ ਨਹੀਂ ਹੋ ਸਕਦਾ ਕਰੇ ਨਹੀਂ ਸਕਦਾ ਕਹੇ ਤੁਹਾਡੇ ਜਿਹੜੇ ਪਿੱਛੇ ਟੰਡਾ ਹੱਟਦੇ ਆਂ ਚਿਹਰੇ ਕੋ ਉਹ ਕੋਈ ਤੁਹਾਨੂੰ ਲੈ ਗਿਆ ਉਹ ਤਾਂ ਕਿਸ ਨੂੰ ਤੁਸੀਂ ਵੀ ਲੈ ਕੇ ਹੁਣ ਇਹ ਚੇਹ ਤੇ ਨਾਲ ਜਾਂਦਾ ਹੈ ਸਾਰੇ ਜੀਵਨ ਤਾ ਜਾ ਕੇ ਨਿਕਲਦੇ ਨੇ ਜਿਹਨਾਂ ਦੀ ਚੇਂ ਚਲਦੀ ਹੈ ਉਹ ਫਿਰ ਗਿਆਨ ਲੈਂਦੇ ਚਲੇ ਜਾਂਦੇ ਨੇ ਲੈਂਦੇ ਚਲੇ ਜਾਂਦੇ ਨੇ ਲੈਂਦੇ ਚਲੇ ਜਾਂਦੇ ਤੇ ਨਾ ਵੀ ਹਥਲੇ ਅਟੈਚ ਜੇ ਤੂੰ ਕਿਸ ਤੋਂ ਬਾਹਰ ਨਿਕਲ ਤੂੰ ਤਾਂ ਚੇਂ ਤੋਂ ਗੱਦਾਰੀ ਕੀਤੀ ਚੇਂ ਵਾਲਿਆਂ ਦੀ ਜੁਝਿਆ ਰਿਹਾ ਬੜ ਤੈਨੂੰ ਇਹ ਤੱਕ ਲੱਗਿਆ ਤੂੰ ਤਾਂ ਫੰਕਰ ਹੋ ਗਿਆ ਵਾਹ ਦਾ ਹਾਂ ਚੇਂ ਤੱਕ ਆ ਕੇ ਲੱਗ ਗਿਆ ਕੁਦਰਤ ਬਹੁਤ ਕਲੀਅਰ ਗੱਲ ਹੈ ਕੋਈ ਸਮਝਦਾਰੀ ਦੀ ਗੱਲ ਹੈ ਕੋਈ ਜਿਦ ਜਿਦਾਈ ਵਾਲੀ ਗੱਲ ਕੋਈ ਨਹੀਂ ਇਹ ਦੇਚੋ ਸਮਝਦਾਰੀ ਦੀ ਗੱਲ ਹੈ ਵਿਚਾਰਨ ਦੀ ਗੱਲ ਹੈ ਉਹ ਨਾਲ ਜਿਹੜੀ ਜਿਦ ਜਿਦਾਈ ਆ ਉਹਦਾ ਉਹਨੂੰ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਸੰਧਾ ਅਸਲ ਤੋਂ ਲੈ ਲੇ ਦੀਆਂ ਕ੍ਰਿਸ਼ਪਰਦਾਨ ਕਿਹਾ ਹੈ ਇਹ ਧਰਮ ਹੈ ਕ੍ਰਿਸ਼ਤੀਆਂ ਦਾ ਧਰਮ ਹੈ ਪ੍ਰਦਾਨ ਹੈ ਕਿਸ ਤੱਕ ਧਰਮ ਹੀ ਪ੍ਰਦਾਨ ਕਰਦਾ ਹੈ ਬਗਾਇਰ ਕ੍ਰਿਸ਼ਤੇ ਧਰਮ ਪ੍ਰਦਾਨ ਹੈ ਉਹ ਨਹੀਂ ਵੱਡੇ ਟੱਬਰ ਦੀ ਜ਼ਿੰਮੇਵਾਰੀ ਜਤਨ ਕ੍ਰਿਸ਼ਤ ਹੈ ਸਾਧਨਾ ਨਾਲ ਨਹੀਂ ਚੱਕੀ ਨਹੀਂ ਉਹ ਕ੍ਰਿਸ਼ਤੇ ਹੀ ਉਹਨਾਂ ਦੀ ਹੋ ਜੀ ਤੁਹ ਫੇਰਾ ਪੇਸਾ ਤੋਂ ਮਾਤਾ ਇਸਤਰੀ ਮਾਤਾ ਫੇਰਾ ਕ੍ਰਿਸ਼ਤੀ ਹੁੰਦਾ ਹੈ ਹੋਰ ਕੀ ਹੁੰਦਾ ਹੈ ਤੁਸੀਂ ਕਹੇ ਜੋ ਬਾਹਰ ਨਿਕਲੇ ਥੋੜਾ ਕੌਣ ਹੈਗਾ ਤੁਸੀਂ ਕਿਸੇ ਦੇ ਬਣਾ ਰਹੇ ਉਸੀ ਕਹੇ ਤਾਂ ਕਮਿਆਂ ਆ ਤੁਹਾਡੇ ਕੰਮ ਆਉਣਾ ਆਊਗਾ ਹਾਂਜੀ ਬ੍ਰਹਮ ਗਿਆਨੀ ਕੀ ਇੱਕ ਉੱਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਨਾ ਸਕਦਾ ਬ੍ਰਹਮ ਗਿਆਨੀ ਕੇ ਇੱਕ ਉੱਪਰ ਆਸ ਹੈ ਉਹ ਤਾਂ ਹੁਕਮ ਤੇ ਆਸ ਹੈ ਇਸ ਕਰਕੇ ਬ੍ਰਹਮ ਗਿਆਨੀ ਦਾ ਵਿਨਾਸ਼ ਨਹੀਂ ਇੱਕ ਦਾ ਵਿਨਾਸ਼ ਨੇ ਉਹਦਾ ਵੀ ਵਿਨਾਸ਼ ਜਿਹਦੀ ਆਸੇ ਨਾ ਸੀ ਤੇ ਹੈ जिदी आशे बनासी दे कि होई है ओ मरूगे मैं मरना की हुंदा जीवे आशा मरे न रसा जिदी आस पूरी ना होवे मर जत आस लेके चले सी मरने वेले ते बूढी सी होई मर गया ਜੀਦੀ ਆਸਾ ਪੂਰੀ ਹੋ ਗਈ ਹੋ ਰਹੀ ਆ ਪੂਰੀ ਲਗਾਤਾਰ ਚੱਲ ਰਿਹਾ ਜੀਵ ਨੂੰ ਉਹ ਤੇ ਜੁਦਾ ਰਹੂਗਾ ਜੀਵੇ ਆਸਾ ਕੋਈ ਨਾ ਆਸ ਕਹੇ ਰਵਿਦਾਸ ਆਸ ਲੱਗ ਜੀਵੋ ਚਿਰ ਪੈ ਹੋ ਦਰਸ਼ਨ ਆਸਾ ਜੇ ਟੋੜੀ ਚੱਲੀ ਹੋਈਆ ਇਹ ਤਾਂ ਨੂੰ ਨਾਮ ਨਹੀਂ ਵੀ ਬੜਿਆ ਸਾ ਨਾਮ ਤੇ ਵੀ ਬੜੂਗਾ ਤਾਂ ਵੀ ਜੀਵਨ ਚਲੂ ਹੋਏਗਾ। ਚਾਹੇ ਅੱਗੇ ਨੂੰ ਮੜੀ। ਨੂੰ ਆਵੇ ਜਿੱਦਾਂ ਤੈਨੂੰ ਫੁਰਨਾ ਹੋਊਗਾ ਵੀ ਨਾਮ ਫਿਰ ਜਾਣਾ ਚਾਹੀਦਾ। ਉਹਦਾਂ ਕੁ ਵੀ ਨਾਮ ਚਾਹੀਦਾ ਭਾਈ। ਤੇ ਸੁਣਨਾ ਹਾਂ ਚੱਲ ਰਹਿ ਜਨ। ਸਾਡੂ ਵੀ ਕੰਮ ਹੈ, ਸਾਡਾ ਵੀ ਪਿੱਛੇ ਕੰਮ ਹੈ। ਉਹ ਮੋਗਾ ਉੱਤੇ ਚੱਲਦਾ ਫਿਰ ਆਹ ਚੈਨਾਵਲਿਆਂ ਨਾਲ ਪਾਰਟ ਹੋਤੇ ਠੂੜਾ ਜੀ ਹੋਣ ਲੱਗੋ ਵੀ ਚਲੋ ਬੰਨਾਂ ਦੀ ਰੋੜੇ ਦੇ ਪਾਸੇ ਹੋਣਾ ਹੋ ਜੋ ਉਹ ਆਹ ਦੀ ਵਹਿਜੇ ਰੋੜ ਪੈਂਦੀ ਆ ਜਿਵੇਂ ਆਪਣਾ ਪੈਂਦੀ ਆ ਸਾਖਣਾਂ ਵਾਲੇ ਨੂੰ ਵੀ ਪੈਂਦੀ ਇੱਥੇ ਪਾਰਕੀ ਬਰੋਤੀਆਂ ਦੂਜੀ ਚੱਲਦੀ ਆਏ ਫਿਰ ਹੁੰਦੇ ਨੇ ਤਾਂ ਤੇ ਐਵੇਂ ਦੱਸੋ ਫਰਜ਼ ਇਹ ਸਧਨੀਆਂ ਇੱਥੇ ਆਲੀਆਂ ਗੱਲਾਂ ਨੇ ਬਾਹਰ ਉਹ ਦ੍ਰਿਸ਼ਾ ਦ੍ਰਿਸ਼ਾ ਆਪਾਂ ਸੁਪਨੇ ਆ ਉਹ ਸੁਪਨੇ ਹੈ ਜੀ ਇਹ ਜਿਹੜਾ ਸਾਹਮਣੇ ਹੈ ਇਹਦੇ ਨਾਲ ਜਿਹੜਾ ਦੂਆ ਸਮਝਾਉਂਦਾ ਹਾਂਜੀ ਬ੍ਰਹਮ ਗਿਆਨੀ ਕੈ ਗ੍ਰਿਪੀ ਸਮਾਹਾ ਹਾਂ ਬ੍ਰਹਮ ਗਿਆਨੀ ਪਰੋ ਪੁਕਾਰ ਉਮਹਾ ਉਹਦੇ ਅੰਦਰ ਗ੍ਰਿਪੀ ਸਮਾਈ ਹੋਈ ਜਾਂਦੀ ਗ੍ਰਿਪ ਨਿਬੇ ਸਵਾਰਾ ਹੋਇਆ ਹਾਂ ਉਹ ਗ੍ਰਿਪੀ ਵਾਲਾ ਜਿਹੜਾ ਹੈ ਵੜਿਆਈ ਦੀ ਭੁੱਖ ਜਿਹੜੀ ਹੁੰਦੀ ਆ ਧਰਮ ਦੀ ਜਿਹੜੀ ਵੜਿਆਈ ਦੀ ਭੁੱਖ ਨਹੀਂ ਜਾਂਦੀ। ਜਦ ਵੜਿਆਈ ਦੀ ਭੁੱਖ ਜਾਗਿਆ ਹੀ ਫਿਰ ਗਰੀਬ ਰਹਿਣਾ। ਫਿਰ ਗਰੀਬ ਰਹਿਣਾ ਚਾਹੁੰਦਾ ਨਹੀਂ ਜਿਆ ਗਰੀਬੇ ਹੋਵੇ। ਜਿਹੜਾ ਗਰੀਬੀ ਗਰੀਬ ਰਹਿਣਾ ਚਾਹੁੰਦਾ ਨਹੀਂ ਦੁਨੀਆਵੀ ਤੌਰ ਤੇ। ਬਗਾਇ ਵੀ ਗੱਲ ਹੈ। ਹਾਂ? ਬੁਰੀ ਭੁੱਖ ਜਾਗਦੀ ਬੜੇ ਜੀ ਸਾਰਿਆਂ ਜੱਗ ਹੋਈ ਹੈ ਕੌਣ ਹੈ ਬੜੇ ਦੀ ਬਖਤ ਜੇ ਬੜੇ ਦੀ ਬਖਤ ਹੈ ਤਾਂ ਨਾਮ ਦੀ ਬਖਤ ਨਹੀਂ ਬੜੇ ਦੀ ਬਖਤ ਤਿਆਗੇ ਤੇ ਹੀ ਨਾਮ ਦੀ ਬਖਤ ਪੈਦਾ ਹੁੰਦੀ ਹੈ ਅ ਔਚੇ ਤੋਂ ਰੀ ਆਵਾਕੇ ਦਾ ਨਾਮ ਵੀ ਜਾਣੇ ਤੇ ਤੋਈ ਅਲਨ ਵਾਦੋ ਬਦਲੋ ਵਾਦੋ ਜੇ ਨਾਮ ਵੀ ਲੋ ਤੋਰੀ ਆ ਵੀ ਘੜਾ ਰਹੇਗਾ ਨਾ ਵੀ ਹੋਜੇ ਹਵਾ ਥੋੜੀ ਹੋ ਜਾਊਗਾ ਗਰੀਬੀ ਬੇਸੋ ਥੋੜੀ ਜਿਹੀ ਗਰੀਬੀ ਆਈ ਆ ਵੀ ਓਹੋ ਗਰੀਬੀ ਦੇ ਨਾਲ ਕਿੰਨੀ ਉੱਤੇ ਕੋ ਦੌਲਤ ਹੈ ਇਹਦੀ ਗੱਲ ਹੈ ਉਹ ਇਹ ਨਹੀਂ ਕਹਦਾ ਮੈਂ ਉਹ ਹੋਰ ਉੱਤੇ ਜਿਹੜੇ ਮੈਂ ਬਰਾਬਰ ਵਾਲੇ ਮੈਂ ਉੱਤੇ ਨਹੀਂ ਉਹ ਆਦਮੀ ਹੈ ਉਹ ਹੈ ਬੱਸ ਹੋਰ ਨਹੀਂ ਆ ब्रह्मज्ञानी परोपकार उमहा ब्रह्मज्ञानी परोपकारम वहा ब्रह्मज्ञानी दू अंदर होदे परोपकार दी बहुत खुशी दी हो दी है जाने कि दे न्याले नु कब कह दे भज के जड़ा करदे ना भज के चाहना होता पहले ही ऐ भज के पेदो परोपकार दे काम वहा वहा का पतके पैन ਸੇ ਪਰਪਕਾਰ ਦੇ ਕੰਮੋਂ ਭੱਜ ਕੇ ਬੈਠਾ ਚੌਂ ਨਾਲ ਬੈਠਾ ਬਾਬਾ ਜੀ ਉਹ ਮੰਗ ਵੀ ਹਾਂ ਬ੍ਰਹਮ ਗਿਆਨੀ ਕਾ ਬ੍ਰਹਮ ਗਿਆਨੀ ਨੇ ਤਾਂ ਉਹ ਤਾਂ ਬੰਦੋ ਬ੍ਰਹਮ ਗਿਆਨੀ ਦਾ ਤਾਂ ਦਾ ਨਹੀਂ ਹੈਗਾ ਪਰਕਾਰ ਦਾ ਤਾਂ ਦਾ ਹੈਗਾ ਹੁਮਾ ਹੈ ਉਹਦੀ ਭੁੱਖਾ ਪਰਪਕਾਰ ਨਾ ਕਿ ਧਦਾ ਹੈ ਉਦੋਂ ਮਾਦਾ ਮਿਲਦਾ ਭੁੱਖ ਨੂੰ ਤਾਂ ਰੋਟੀ ਜਿਵੇਂ ਭੁੱਖੇ ਨੂੰ ਰੋਟੀ ਮਸਾਂ ਮਿਲਦੀ ਹੈ ਐ ਐ ਉਹਨੂੰ ਪਰਪਕਾਰ ਦਾ ਟਾਈਮ ਮਸਾਂ ਮਿਲਦਾ ਉਹਦਾ ਤਾਂ ਨਹੀਂ ਹੈਗਾ ਵੀ ਜਪਾਂ ਆ ਕੱਲ ਦਾਖਤ ਬਣਾਵਾਂਗੇ ਤਾਂ ਸੋਨਾ ਲਾ ਲਾਂਗੇ ਬਾਕੀ ਹੋਰ ਆ ਜਾਊਗਾ ਕਿ ਜੇ ਬਿਨਾਂ ਪੈਸੇ ਬੱਝਣਗੇ ਇਕੱਠਾ ਕਰ ਆ ਨਹੀਂ ਤਾਂ ਉਹਦਾ ਹਗਾ ਅਗੁਰਦਾਰ ਬਣਾ ਆ ਗਿਆ ਨੰਦਸਲਾਮ ਨਹੀਂ ਆਉਗਾ ਮੋਰਚਾ हां ओदा जेड़ा ओदे गोळा उने होई देदा ना परो कहता नहीं मरदा हो हां जी ब्रह्म ज्ञानी ले ताव तो बन्दा ब्रह्म ज्ञानी ले ताव तो भक्त आजरे बन्ना ने ना दुनिया भी ओ दुनिया कह ਜਨ ਲਹਿਣ ਆਲੇ ਆਲੇ ਭਜਨ ਦੇ ਤੋੜ ਤੜ ਕੇ ਕਾਵਤ ਉਹ ਨੂੰ ਇਹ ਬੰਦਾ ਰੋਕ ਨਹੀਂ ਸਕਦੇ ਉਹਨੂੰ ਭਜਣ ਤੇ ਰੋਕ ਨਹੀਂ ਸਕਦੇ ਉਹ ਬੰਦਨ ਜੇ ਭਜੂਗਾ ਬੰਦਨ ਨੂੰ ਤੋੜ ਦੂਗਾ ਜੇ ਜ਼ਿਆਦਾ ਬੰਦਨ ਟੈਟੋਂ ਤਾਂ ਵੀ ਉਹ ਟੁੱਟ ਜੂਗਾ ਸਮਝ ਨਹੀਂ ਆ ਰਿਹਾ ਕੋਈ ਪਰ ਤਾਂ ਟੁੱਟ ਸਕਦਾ ਪਰ ਉਹ ਦੀ ਰੁਕਦਾ ਉਹ ਦੀ ਪਰਮਗਤੀ ਹੈ ਨਾ ਪਰਮਗਤੀ ਉਹ ਜਿਹੜੀ ਕਤੀ ਨੂੰ ਕੋਈ ਦੁਨੀਆਂ ਦੀ ਸ਼ਕਤੀ ਰੋਕ ਨਾ ਸਕਦੀ ਹੋਵੇ ਉਹ ਪਰਮਗਤੀ ਹੈ ਜਿਹੜੀ ਰੁਕਦੀ ਨਹੀਂ ਹੁੰਦੀ ਜਿਹੜੇ ਬੰਦੇ ਲੱਗਦੇ ਨੇ ਲੋਕਾਂ ਨੂੰ ਉਹ ਕੋਈ ਨਾ ਉਹ ਲੈ ਕੇ ਉੱੜ ਜਾਂਦਾ ਹੋਣਾ ਆਪੇ ਟੁੱਟਦਾ ਜਾਂਦਾ ਉਹ ਬੰਦੇ ਨੇ ਹੁੱਤੇ ਇਹੀ ਲੋਕਾਂ ਨੂੰ ਲੱਗਦੇ ਹੁੰਦੇ ਨੇ ਹੁੱਤੇ ਇਹੀ ਮੰਨਦੇ ਉਹਦੇ ਨਾਲ 6:00 ਵਜੇ ਆਇਆ ਉਹ ਮੁਰਗਾ ਜਿਵੇਂ ਪਾਣੀ ਜਾਏ ਆਪਾਂ ਦੇ ਕ ਵੀ ਸੰਦਾ ਬਚਨੀ ਸਮਝਿਆ ਉਹ ਆ ਉਹਨੂੰ ਦਾ ਪਤਾ ਜਿਵੇਂ ਬੜ ਬੜ ਕਹਣਾਂ ਮੁਰਗਾ ਵੀ ਉੱਡ ਜਾਂਦਾ ਲੈ ਜਾਂਦੀ ਮੁਰਗਾ ਵੀ ਬੰਦਾ ਕਰ ਦਿਆ ਥੱਲੇ ਆਪੇ ਫਿਰ ਜਾਂਦਾ ਪਾਣੀ ਦੋ ਫੱਜੇ ਮਾਰੇ ਹਿਆਰ ਕਰ ब्रह्मज्ञानी का होए सुफलः ब्रह्मज्ञानी सुफल फलः ब्रह्मज्ञानी का होए सुफल ब्रह्मज्ञानी का जेला कर्ता जो कुछ करता है वो उसका अपने भला हो गई ओडे वास्ते दा भला जो ही है यो ब्रह्मज्ञानी का होए ਉਹ ਤਾਂ ਬਿਲਕੁਲ ਨਹੀਂ ਕਿਹਾ ਪਰਮਾਨੰਥ ਕਹਾਦਾ ਜੇ ਮੰਨਦਾ ਫਿਰ ਕਹਾਦਾ ਉਹ ਨਹੀਂ ਉਹ ਬੁਰਾ ਨਹੀਂ ਕਹਦਾ ਕਿਸੇ ਜੀ ਨੂੰ ਬੁਰਾ ਹੈ ਜੀ ਕਹੇ ਬੁਰਾ ਮੰਨਦੇ ਨੇ ਬੁਰਾ ਹੈ ਉਹ ਨਹੀਂ ਜੇ ਬੁਰਾ ਹੋਵੇ ਉਹ ਕਹਿ ਦੇਵੇ ਐਡਾ ਨਹੀਂ ਆਏਗਾ ਉਹ ਕਹਿਦੇ ਲਿਆਸ਼ ਕਰਦਾ ਦੇਖੋ ਪਰਮੇਸ਼ਰ ਵੀ ਬੁਰਾ ਕਰਦਾ ਹੋਵੇ ਕਹਿ ਵੀ ਦਵੇ ਬਹੁਤ ਬਗੈਰ ਤੋਂ ਆ ਠੱਗ ਜੱਗ ਕੋਠੋਰੀ ਲਈ ਅਜੇ ਇੰਨੀ ਗੱਲ ਆ ਜੇ ਕਹਿ ਸਕਦਾ ਉਹ ਹੋਰ ਵੀ ਕੁਝ ਕਹਿ ਸਕਦਾ ਇਹ ਬੜਾ ਮੂੰਹ ਫੱਟਦਾ ਹੈ ਕੋਈ ਇਹ ਮਾਰੀ ਹੋਈ ਆ ਸਾਨੂੰ ਬੋਲ ਆਇਆ ਨਹੀਂ ਮਿੱਠਾ ਮੁਰਗਾ ਨਾ ਛੱਡੋ ਨਾਲ ਦਾ ਮੂੰਹ ਵਿਡਾ ਲਾਤਾ ਨਾਲ ਤਾਂ ਮੁਰਗਾ ਨਾ ਛੱਡੋ अर्जुन ऐसे आते हुं कहंदे ਛੱਡ ਦੋ ਬਿਲਾਏ ਕਹਦੇ ਸੀ ਤੇ ਛੜਾਉਣੇ ਸੀ ਹਾਂ ਬ੍ਰਹਮ ਗਿਆਨੀ ਸਫਲ ਫਲ ਬ੍ਰਹਮ ਗਿਆਨੀ ਸਫਲ ਫਲ ਬ੍ਰਹਮ ਗਿਆ ਐਸੀ ਕਰਕੇ ਤਾਂ ਲੱਗਦੇ ਨੇ ਐਸੀ ਕਰਕੇ ਤਾਂ ਸਭ ਤੋਂ ਅੱਛਾ ਫਲ ਗਿਆਨ ਦਾ ਇਹੋ ਬ੍ਰਹਮ ਗਿਆਨੀ ਸਭ ਤੋਂ ਸੇਸ਼ਤ ਗਿਆਨ ਫਲ ਇਸੇ ਨੂੰ ਵਰਦਾ ਬ੍ਰਹਮ ਗਿਆਨੀ ਨੂੰ ਲੱਗਦਾ ਵਾਕਿਆ ਨੂੰ ਨਹੀਂ ਕਹਦਾ ਕਿ ਉਹ ਬਾਕੀ ਕਿਹੋ ਜਿਹਾ ਕਿਤੇ ਕਿਤੇ ਅ ਮਤਲਬ ਇਹ ਨਾ ਆ ਚੱਲਣਾ ਜੀ ਉਹਦਾ ਤਦਾ ਹਰ ਕਬੂ ਉਹਨਾਂ ਉਹ ਖੁਸ਼ੀ ਖੁਸ਼ੀ ਹੈ ਮੰਨਦੇ ਇਹ ਆ ਵੀ ਉਹਨਾਂ ਕਲੀਅਰ ਗਿਆਨ ਨਹੀਂ ਹੈ ਕਿ ਵਾਕਿਆ ਹੀ ਜੋ ਕਰਤਾ ਸਰਗਾ ਠੀਕ ਹੈ ਚਾਹੇ ਉਹ ਮੰਨ ਲੈ ਨੰਨੇ ਸੁਣੇ ਸੁਣਾਈ ਗੱਲ ਕਰਦੇ ਵੀ ਪਰ ਪੂਰੀ ਉਹ ਕੋਈ ਦਸਲੀ ਨਹੀਂ ਹੈ ਜਦੋਂ ਆਪਾਂ ਵੀ ਜੀ ਫਿਰ ਉਧਰ ਦੇ ਪੈਦਾ ਉਹ ਤੋਂ ਕਹਿਣਾ ਇਹੰਦਰ ਥੋੜੀ ਜਿਹੀ ਹੈ ਫਰਕ ਉਹਨਾਂ ਦੇ ਥੋੜਾ ਬਹੁਤ ਹੈ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਉਹ ਆ ਜਾਂਦਾ ਤੰਨੇ ਜਦੋਂ ਪਈਓ ਬਸ ਨਹੀਂ ਜਾਂਦਾ ਜਦੋਂ ਮੰਨੇ ਲੈਣੇ ਇਹ ਆਪਣਾ ਚੇਲ ਕੋਈ ਪਾਈ ਮੰਗਣਾ ਬਹੁਤ ਜਿਹੜਾ ਹੋ ਗਿਆ ਉਹ ਤਾਂ ਕੋਈ ਜਾ ਹੈ ਜੀ ਯਾਨੀ ਇੰਨਾ ਗੱਲਾਂ ਵੀ ਦੱਸਦਾ इतना टाणा भी नहीं जड़ा है ये गल दुखी होके बजी है दुख अंतरों दुख है या जरा दुख मन नहीं बैठा उतना संपत्ति है पण वे निगा भी तू शंका छोड़ कुछ भी बुरा नहीं है का जो होना सी हो गया बस तू चुप दा करो कल दे पता कल क्या हो जाना चांदी वाली खबर ता पैर पैरते उभी रहनी ਜੇ ਕਹਾਂ ਨੂੰ ਬਦਾਂ ਤੇ ਵਧੀਆ ਖਬਰ ਆ ਗਈ ਕੋਈ ਫੇਰ ਵਧੀਆ ਲੀਕੋ ਵਧੀਆ ਹੀ ਮੰਨੋ ਜੋ ਹੋ ਗਿਆ ਉਹਨੂੰ ਵਧੀਆ ਹੀ ਮੰਨੋ ਉਹ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਬ੍ਰਹਮ ਗਿਆਨੀ ਦੇ ਨਾਲ ਪੂਰੇ ਦਾ ਪੂਰਾ ਉਧਾਰ ਹੋ ਜਾਂਦਾ ਸਗਲ ਉਧਾਰ ਅਨੇ ਆ ਜਾਣਾ ਕੁਲ ਦੇ ਤੋਂ ਪੂਰਾ ਪੂਰਾ ਹੋ ਜਾਂਦਾ ਸਗਲ ਉਹ ਸਗਲ ਨੂੰ ਸਾਰੇ ਦਾ ਨਹੀਂ ਹੈਗਾ ਅਸਰ ਅਹ ਹੋਜੀ ਨਾ ਲੇ ਕਾ ਬ੍ਰਹਮ ਗਿਆਨੀ ਜਪ ਸਗਲ ਸੰਸਾਰ ਤਾਨਕ ਬ੍ਰह्म ਗਿਆਨੀ ਜਪੈ ਸਗਲ ਕੋ ਖੋਰੋ ਕਿ ਜਪੈ ਸਿਰਫ ਸਰਪ ਗਿਆਨੀ ਚੇਤਨ ਇਹ ਨੂੰ ਸਮਝ ਰਹਾ ਬ੍ਰह्म ਗਿਆਨੀ ਨੂੰ ਸਾਰਾ ਸੰਸਾਰ ਤੇ ਬ੍ਰह्म ਗਿਆਨੀ ਕਿਵੇਂ ਬਣਿਆ ਜਾ ਸਕਦਾ ਸਗਲ ਸੰਸਾਰ ਬ੍ਰह्म ਗਿਆਨੀ ਹੋਣ ਵਾਸਤੇ ਹੀ ਗਿਆਨ ਹਾਸਲ ਲੈਣਾ ਕੋ ਬ੍ਰह्म ਗਿਆਨੀ ਲਾਸਟ ਵਾਲੀ ਸਟੇਜ ਕਿਆਤੀ ਲਾਸਟ ਸਟੇਜ ਅੰਤਿਜਮੇ ਹੁੰਦਾ ਹੈ ਉਹ ਵਰਮ ਗਿਆਨ ਵਰਮ ਗਿਆਤੀ ਸਭਾ ਧਿਆਨ ਲੈ ਕੇ ਧਰਮ ਦਾ ਜਾ ਰਿਹਾ ਟਾਰਗੇਟ ਸਾਰੇ ਅਦਾ ਵਰਮ ਗਿਆਨੀ ਬੱਜੋ ਤਾਂ ਹੀ ਸੰਤ ਕਹਿੰਦਾ ਵਰਮ ਗਿਆਨੀ ਜੀ ਵਰਮ ਗਿਆਨੀ ਸਾਰੇ ਪਰ ਵਰਮ ਗਿਆਨੀ ਨੇ ਪਰਮ ਗਿਆਤੀ ਨੇ ਉਹ ਤਾਂ ਆਪਣਾ ਦੇਖ ਲੈਣਾ ਬੁਲਾ ਕੇ ਇਥੇ ਲਿਖਿਆ ਹੋਇਆ ਕਉਂਦ ਕਉਂ ਬਰੁਮ ਕਾਨੀ ਦੀ ਬੋਲ ਖੇਤੀ ਕਰਦੀ ਆ ਬਹੁਤ ਬਗਰਾਮ ਕਰਦਾ ਬਰੁਮ ਕਾਨੀ ਸ਼ਬਦ ਹਾਂ ਪਹਿਲਾਂ ਸਾਧ ਕੀਤਾ ਸੰਕ ਕੀਤਾ ਉਹਨਾਂ ਕੀਤਾ ਹੀ ਤੈਸੀ ਉਹਨੂੰ ਬਰੁਮ ਕਾਨੀ ਕਰਤਾ ਹੈ ਪ੍ਰਿਆਸ ਉਹ ਪਰਪੰ ਸ਼ਬਦ ਬਦਲਿਆ ਇਹਦੀ ਜਾ ਸਕਦਾ ਇਹ ਸਹਿਮ ਦਾ ਸੇਹ ਰਹੂਗਾ ਇਹਨਾਂ ਨੂੰ ਬਰੁਮ ਕਾਨੀ ਇਹਨਾਂ ਨਧਰੀ ਨੇ ਇਹਨਾਂ ਨੂੰ ਝਾੜ ਕੇ ਪਰੇ ਹਾਰਾਂਗੇ ब्रह्म ज्ञानी शब्द नहीं बदलना रहूगा हमेशा यही रहना <सथा> ब्रह्म ज्ञानी जपा सगल सगल संसार क्योंकि ब्रह्म ज्ञानी पर हमेशा श्रद्धा रो है ब्रह्म जीव हमारी क्या काद पैजी है थे में पै जाती है कि में हुंदी है ये परमेश्वर जाणदा ब्रह्म बारे ब्रह्म भरे ज्ञान जो है परमेश्वर को पैना सबते ਆਜ ਨੂੰ ਬਾਜ ਆਜ ਨੂੰ ਦਾ ਇਹ ਨਹੀਂ ਬਤਾ ਤੈਨੂੰ ਬਿਮਾਰੀ ਕੀ ਹੈ ਸਾਨੂੰ ਤਾਂ ਇਹ ਨਹੀਂ ਬਤਾ ਹੁ ਬਿਮਾਰੀ ਕੀ ਹੈ ਇਹਦਾ ਬਾਦ ਗੁਰੂ ਗੋਬਿੰਦ ਹੈ ਗੁਰੂ ਗੋਬਿੰਦਾ ਗੁਰ ਗੋਬਿੰਦ ਨਹੀਂ ਹੈ ਗੁਰੂ ਸ਼ਬਦਾ ਉੱਤੇ ਗੁਰੂ ਗੋਬਿੰਦਾ ਗੁਰ ਗੋਬਿੰਦ ਨਹੀਂ ਹੈ ਹਾਂ ਗੁਰੂ ਗੋਬਿੰਦ ਗੁਰ ਗੋਬਿੰਦ ਨਹੀਂ ਹੈ ਗੁਰੂ ਗੋਬਿੰਦਦਾਤਾ ਆਪ ਮੁਹਾਰਸੀ ਗਾ ਇਹ ਤਾਂ ਆਪੇ ਮੁਹਾਰਸੀ ਇਹਦਾ ਇਤਿਹਾਸੇ ਠੀਕ ਹੋਇਆ ਪਰਮ ਗਿਆਨੀ ਜਬੇ ਹੈ ਨੇ? ਗੁਰੂ ਗੋਬਿੰਦ ਨੇ ਗੁਰੂ ਉਹ ਤਾਂ ਹੁੰਦੇ ਹੀ ਹੋਣੇ ਇਹਨਾਂ ਦੇ ਤਲਾ ਗੁਰੂ ਗੋਵਿੰਦ ਉਹ ਦੋ ਖੜੇ ਗੁਰੂ ਗੋਬਿੰਦ ਆਇਆ ਕੋਣ ਕੋਰ ਗੋਬਿੰਦ ਜੀ ਸਾਡੇ ਉਸ ਨੂੰ ਗੁਰਖਾ ਉਸ ਨੂੰ ਗੋਬਿੰਦ ਇਹਨਾਂ ਨੇ ਆਜ਼ਮ ਨੂੰ ਗੋਬਿੰਦ ਨੂੰ ਬਣਾਤਾ ਸੀ ਨਾ ਰੱਬ ਗੁਰੂ ਗੁਰੂ ਗੋਬਿੰਦ ਨੂੰ ਬਣਾਤਾ ਚੇਲਾ ਗੁਰੂ ਨੂੰ ਬਣਾਤਾ ਇਹਨਾਂ ਨੇ ਐ ਕਰ ਲਿਆ ਸੀ ਜਿਹੇ ਸੰਹਾਰਤਾ ਉਹ ਵਾਨਾ ਉਹਦਾ ਗੁਰੂ ਬਣਾਤਾ ਰੱਬ ਉਹ ਤੋਂ ਉੱਪਰ ਭਗਵਾਨ ਤੋਂ ਉੱਪਰ ਉਹ ਬਾਤੀ ਉੱਤਰ ਕੁਝ ਨਹੀਂ